ਸ਼ਲੋਕ ਮਹੱਲਾ ਤੀਜਾ ਗੂਜਰੀ ਜਾਤ ਗਵਾਰ ਜਿਆਸੋ ਪਾਏ ਆਪਣਾ ਗੁਰਕੇ ਸ਼ਬਦ ਸਾਰ ਅੰਨ ਦਿਨ ਹਰ ਜਪ ਜਾਪਰ ਕੋ ਜਿਹੇ ਜਾਤ ਕੀ ਗਵਾਰੀ ਰਾਰੇ ਨੂੰ ਤੇ ਹੈ ਰਾਰਾ ਲੱਲੇ ਦੇ ਤੋਂ ਵਰਤਿਆ ਹੋਇਆ ਹੈ ਕੁਝ ਜੀ ਨੇ ਜਿਹੜੀ ਜਾਤੀਆਂ ਸ਼ਰੀਰ ਸੀ ਗਵਾ ਲਿਆ ਖਰਬ ਕਰ ਲਿਆ ਆਪਣ ਨੂੰ ਕਰ ਲਿਆ ਫਰੀਦ ਜਿਹੜਾ ਫਤ ਤੱਤ ਅੱਛਾ ਜੀ ਚਾਹ ਸਭ ਪਾਏ ਆਪਣਾ ਚਾਹ ਸਭ ਪਾ ਲਿਆ ਨਾ ਇਹ ਸ਼ਬਦ ਸਰਕਾਰ ਹੋ ਗਿਆ ਫਰੀਦ ਚ ਆਫ ਚੜੀ ਗਈ ਤੁਰਿਆ ਪਾਚ ਦੂਜਰੀ ਦੀ ਵਿਆਖਿਆ ਜੀ ਗੁਜਰੀ ਕੋਈ ਵੀ ਹੋ ਸਕਦੀ ਆ ਪਰ ਇੱਥੇ ਰਾਗ ਗੁਜਰੀ ਚੱਲ ਰਿਹਾ ਨਾ ਹਰ ਇੱਕ ਵਾਰ ਵਿੱਚ ਰਾਗ ਦੀ ਵਿਆਖਿਆ ਹੁੰਦੀ ਹੈ ਇੱਕ ਹੁੰਦਾ ਜ਼ਰੂਰ ਬਿਲਕੁਲ ਗੁਜਰੀ ਅੱਛਾ ਜੀ ਗੁਜਰੀ ਦਾ ਹਾਜ਼ਰ ਗੁਜਰ ਗਈ ਦੀ ਗੱਲ ਹੋ ਗਈ ਉਹ ਠੀਕ ਹੈ ਜੀ ਆਪਾਂ ਕਹਿੰਨਾ ਬਰਨਾਂ ਬਰਨ ਗੁਜਰ ਗਿਆ ਉਹ ਤੋ ਅਰਥ ਲਾਓ ਦੀ ਯਾਦ ਦੀ ਗੱਲ ਨਾ ਕਰੋ ਨਾ ਮੈਂ ਯਾਦ ਦੀ ਨਹੀਂ ਮੇਰੇ ਗੁਜਰੀ ਅੱਖਾਂ ਦੀ ਚੱਲ ਕਰਦੇ ਆਂ ਤੇਰੀ ਅੱਖਾਂ ਦਾ ਗੁਜ਼ਰ ਕੇ ਖਤਮ ਹੋ ਗਈ ਉਹਦੀ ਕਹਾਣੀ ਠੀਕ ਹੈ ਜੀ ਫੇਲ ਗਈ ਉਹ 80 ਲੱਖ ਜੋਰ ਗੇੜਾ ਨਾ ਗੁਜ਼ਰ ਗਿਆ ਠੀਕ ਹੈ ਖਤਮ ਹੋ ਗਿਆ ਸਰੀਰ ਨੇ त्यागਤਾ ਸੋ ਆਪਣਾ ਪਾ ਲਿਆ ਠੀਕ ਹੈ ਜੀ ਗੁਜਰੀ ਜਾਤ ਗਵਾਰ ਚਾਹ ਸੋ ਪਾਏ ਆਪਣਾ ਗੁਰ ਗਵਾਰੀ ਦਾ ਨਾਮੋ ਕਵਾਲਈ ਹਾਂਜੀ ਠੀਕ ਹੈ ਜੀ ਆਇਆ ਤੇ ਆਵੇ ਤੇ ਪਰਮਕਾਸ਼ ਕਰਤਾ ਉਦੋਂ ਗੁਰਪ੍ਰਸਾਦ ਕੁਝ ਨਹੀਂ ਲਭਦਾ ਤਾਂ ਆਇਆ ਇਸ ਲਈ ਕੀ ਇਸ ਅੱਛਾ ਜੀ ਕਿਤੇ ਇਹਨਾਂ ਸਮੇਂਾਂ ਵੀ ਔਰਤ ਵਾਸਤੇ ਕੁਰਮੁਖੀ ਵੀ ਆਇਆ ਲਾਹਰ ਇੱਥੇ ਆਗੇ ਕਫਰ ਦੀ ਸਵਾਈਦ ਹੋ ਰਿਆ ਜਾਂਦਾ ਕੁਰਮੁਖੇ ਆਇਆ ਵੀ ਹੈ ਜੋ ਸ਼ਬਦ ਦੇ ਹੁਕਮ ਦੇ ਅਧੀਨ ਸਭਨਾਰ ਜੋ ਹੁਕਮ ਹੈ ਨੇ ਸਾਰੀਆਂ ਮਤਾਂ ਨੂੰ ਪੂਰਾ ਕੀਤਾ ਮਤਲਬ ਹੈ ਪੂਰਾ ਕਰਜ਼ਵਾਲਾ ਇਹਨਾਂ ਦਾ ਅਧੂਰਾਪਣ ਸਾਰੀਆਂ ਮਤਾਂ ਦਾ ਅਧੂਰਾਪਣ ਜਿਹਨੇ ਪੂਰਾ ਕੀਤਾ ਕੋਰਖ ਹੈ ਅਕੀਰ ਦੇ ਹੁਕਮ ਦੇ ਵਿੱਚ ਠੀਕ ਹੈ ਅਜਿਹਾ ਅਰਥ ਹਉ ਦਾ ਸਾਰੀ ਨਾਰਪੁਰ ਖੜਾ ਕੋਈ ਵੀ ਹੋਣਾ ਇਹ ਵਿਦਵਾਨਾਂ ਦੇ ਘਰ ਵੇਲੇ ਦਾ ਅਰਥ ਨਹੀਂ ਠੀਕ ਹੈ ਜੀ ਗੁਰ ਸ਼ਬਦ ਵਿਚਾਰ ਅਨੰਦਨ ਹਰ ਜਪ ਜਾਪਣਾ ਗੁਰ ਸ਼ਬਦ ਵਿਚਾਰ ਵਿੱਚ ਰਹਿੰਦੀ ਹੈ ਕੁਰਬਾਨੀ ਵਿਚਾਰ ਵਿੱਚ ਰਹਿੰਦੀ ਆ ਦੁਆ ਕਰ ਜਾਂਦੀ ਹੋਈ ਨਹੀਂ। ਪੁੱਛਦੇ ਘਰ ਨਹੀਂ ਜਾਂਦੀ ਵਿਚਾਰ ਦੇ ਘਰ ਕੇ ਜਾਂਦੀ ਆ। ਜੋ ਜਾਲਾ ਘਰ ਛੱਡਦਾ ਤੇ ਕੁੜੀ ਛੱਡਦੀ। ਲੈ ਆ ਹਰਦਾ ਵਿਚਾਰ ਵਾਲਾ ਘਰ। ਗੁਰਕੈ ਸ਼ਬਦ ਵਿਚਾਰ। ਜਪ ਜਾਪਣ। ਹਰ ਕੀ ਹੈ? ਇਹਦਾ ਜਿਹੜਾ ਜਪ ਇਹੋ ਜਿਹੇ ਜਾਣਨ। ਇਹਦੀ ਜਾਣਕਾਰੀ ਹੈ, ਯੱਗ ਜਾਣਕਾਰੀ ਹੈ। ਇਹ ਨੋ ਸਭ ਜਣ ਹਰੂ ਇਹ ਹਰ ਕੀ ਕਥਾ ਹੈ ਸਾਰੀ। ਅਸੰਦੇ ਵਿੱਚ ਇਹ ਪਰਮੇਸ਼ਰ ਦੀ ਕਹਾਣੀ, ਰੱਬ ਦੀ ਕਹਾਣੀ ਨਹੀਂ ਰੱਬਾਂ ਜਬੇ। ਰਾਵਨਾਂ ਜਬੇ ਨਾ ਮਰਿਆ, ਨਾ ਦਾ ਮਾਂ, ਉਹਦੀ ਕਹਾਣੀ ਤੇ ਬਣਦੀ। ਨਾ ਉਹਦਾ ਕੋ ਮਜੂਰ ਨਾ ਅਖੂਦੂ ਦੀ, ਉਹਦੀ ਕਹਾਣੀ ਤਾਂ ਸੁਣਾਈ ਹੈ ਕਥਾ ਇਹਦੀ ਸੁਣਾਈ ਹੈ ਇਹਦੀ ਆ ਜਿਹੜਾ ਸੁਣ ਰਿਹਾ ਹੈ ਨਾ ਇਹਦੀ ਕਥਾ ਇਹਨੂੰ ਸੁਣਾਈ ਹੈ ਆ ਤੂੰ ਖੂਦ ਕਿਉਂ ਡਿ ਗਿਆ ਬੜਿਆ ਆਕਲ ਮੁੰਡਾ ਤੂੰ ਕਿਉਂ ਛੱਡਿਆ ਸੱਚਖੰਡ ਤੋਂ ਥੱਲੇ ਕਿਉਂ ਡਿ ਗਿਆ ਕਿ ਕਿਨਾ ਚਿਰ ਡਿ ਰਹੇਗਾ ਜੇ ਇਤਨਾ ਦੁਖੀ ਹੋ ਗਿਆ ਤਾਂ ਕਿਵੇਂ ਤਰੀਕਾ ਫੇਰ ਮੇਰੇ ਕੋਲ ਪਹੁੰਚਣਾ ਆ ਬਤਾ ਇਹ ਹਰ ਹੈ ਹਰਕੀਆਂ ਕਥਾ ਕਹਾਣੀਆਂ ਉਹ ਵੀ ਸੁਣਈਆਂ ਗੁਰਬੀਤ ਵੀ ਆ ਗਿਆ ਆਉਂਦਾ ਨਹੀਂ ਹੈ ਕਰੋ ਕਥਾ ਹੋਰ ਕੁਲਵੰਤੀ ਨਾਰ ਜੇ ਸਤਗੁਰ ਮਿਲੈ ਮਿਲ ਜਾਂਦਾ ਇਹ ਸਾਚ ਦਾ ਗਿਆਨ ਮਿਲ ਜਾਂਦਾ ਜਿਸ ਸੱਚ ਦਾ ਪਤਾ ਲੱਗ ਜਾਂਦਾ ਉਹਦੇ ਵਿੱਚ ਪ੍ਰੇਮ ਪੈਦਾ ਹੋ ਜਾ। ਪਾਉ, ਤਾਪ ਰੇਗ। ਅਜਿਹਾ ਭੈ ਹੁੰਦਾ ਹੈ ਕਿ ਹੁੰਦਾ। ਗਿਆਨ ਪੈਦਾ ਕਰਦਾ। ਸਾਰੇ ਹੈ ਇੱਕ। ਇੱਕੋ ਆਪ ਦੀ ਇਲਾਜ ਹੈ। ਜਿੱਥੇ ਡਿਊਟੀਆਂ ਨੇ ਜਿਹਦੀ ਅਕਲ ਹੈ ਉਹਦੀ ਸੰਭਾਲੀ ਹੋਈ ਹੈ। ਜਿੱਦੀ ਕੋਲ ਅਕਲ ਹੁੰਦੀ ਹੈ ਉਹਦੀ ਤੇ ਡਿਊਟੀ ਸੰਭਾਲਦਾ ਹੁੰਦਾ ਘਰ ਤੇ। ਵੱਡੀ ਡਿਊਟੀ ਦੇ ਜਦਾਂਗੇ ਵਗਾੜ ਦੂਗਾ ਠੀਕ ਹੈ ਫਿਰ ਜੇ ਕੋਈ ਜ਼ਿਆਦਾ ਹਮਾਰ ਦੂਗਾ ਸਿਮਰਨ ਦਾ ਉਹਦਾ ਵੀ ਨਾਲੇ ਹੈ ਬੁਰਨਾ ਤਾਂ ਕਰਦਾ ਹੀ ਆ ਕਰਦਾ ਵੀ ਵਾਲਕ ਬਣਾ ਪਰਦਾ ਹੀ ਆ ਹੋਈ ਤਿਸ ਭਉ ਨਾਰ ਤਾ ਹੁਕਮ ਪਛਾਣੇ ਕੰਤ ਜਿਸ ਨੂੰ ਕਿਰਪਾ ਕੀਤੀ ਕਰਤਾਰ ਨਾ ਪੁਲਵੰਤੀ ਨਾ ਰ ਪੁਲਵੰਤੀ ਨਾ ਰ ਅਸਰੋ ਪਰ ਬੇਬਲ ਪੁਲਵੰਤੀ ਆ ਬੇਬਲ ਹੈ ਉਹਦੀ ਉਹ ਗਈ ਨਾ ਸੀਤਾ ਰਹੀ ਨਾ ਦ੍ਰੋਪਤੀ ਰਹੀ ਨਾ ਸੁਯਾ ਰਹੀ ਕੁਲਾ ਹੋਰ ਸੀ ਸ਼ਰੀਰ ਕੁਲ ਨਹੀਂ ਆ ਉਹ ਗਲੀਆਂ ਉਹ ਬੇਬਲ ਕੁਲ ਬਾਲ ਰਹਿਤ ਕੁਲ ਵਿਰਾਹ ਕਾਰਕੂਲ ਇੱਕ ਬੇਟਾ ਇੱਕ ਇਸਕੇ ਵਾਰਕ। ਸੋ ਕੁੱਲ ਵੰਤੀ ਨਾਰ ਕੁੱਲ ਇਕ ਕੋਈਆ ਤੋਂ ਜ਼ੋਦਾ ਹੈ ਜੀ। ਸੰਸਾਰ ਟਿੱਕੋ ਕੋਲ ਇੱਕ ਬੇਟਾ ਹੈ ਇੱਕ ਇਸਕੇ ਵਾਰਕ ਤਾਂ। ਸੋ ਕੁੱਲ ਵੰਤੀ ਨਾਰ ਹੈ। ਉਹ ਆਪਣੇ ਕੁੱਲ ਦੀ ਗੱਲ ਕਰਦੀ ਹੈ ਆਪਣਾ ਕੁੱਲ ਦਾ ਸੁਧਾਰ ਕਰਦੀ ਹੈ। ਕੁੱਲ ਦਾ ਸਾਰਾ ਸੰਸਾਰ ਇਹਦਾ। ਸਰਪਗਾਨਾ ਗੋਣਾ। ਨਾ ਕੋਈ ਦੈਰੀ ਨਾ ਕੋਈ। ਕੋਣ ਜੇ ਬਗਾਨੇ ਆਇਆ ਜੀ। ਅਜਿਆ ਠੀਕਰਿਆਂ ਵਾਸਤੇ ਲੜਨਾ ਜਿਵੇਂ ਟੁਕੜਿਆਂ ਵਾਸਤੇ ਠੀਕਰਿਆਂ ਵਾਸਤੇ ਲੜਨ ਉਹਨਾਂ ਦੀ ਗੁਲਾ ਆਪਣੀਆਂ ਬਣਾਈਆਂ ਹੋਈਆਂ ਨੇ ਕੋਹਾਂ ਆਪਣੀਆਂ ਰੱਖਣ ਕੋਲਾਂ ਗੁਰਬਾਨੀ ਦੇ ਉਹਨਾਂ ਕੋਲਾਂ ਨਕੀ ਲਾਣ ਉਹ ਝਗੜਾ ਇੱਥੇ ਹੀ ਹੈ ਸੰਸਾਰ ਦੇ ਵਿੱਚ ਝਗੜਾ ਹੈ ਜੋ ਕੁਲ ਵਕਤ ਹੁਕਮ ਪਛਾਣੇ ਕੰਤਕ ਉਹ ਅੰਤਤ ਦੇ ਹੁਕਮ ਨੂੰ ਪਛਾਣਦੀ ਹੈ ਜਾ ਕੇ ਸਤਿ। ਕਿਰੋਂ ਕੋ ਪਛਾਣਿਆ ਜਾਂਦਾ ਹੈ। ਆਹ ਉਹ ਕੋ ਕਿਰਪਾ ਕੀਤੀ ਕਰਤਾਰ। ਜਿਸ ਨੂੰ ਕਿਰਪਾ ਕੀਤੀ ਕਰਤਾਰ, ਕਰਤਾਰ ਨੇ ਵੀ ਕਿਰਪਾ ਕੀਤੀ। ਕਰਤਾਰ ਨੇ ਕਿਰਪਾ ਕੀਤੀ ਹੈ ਜੇ ਦੀ ਕੋਈ ਬੁੱਧੀ ਵੀ ਘਾਟਦੀ ਉਹਦੀ ਗੌਰ ਦੇਤੀ। ਜੋ ਜਾਣੇ ਨਾ ਹੁੰਦਾ ਥੋੜਾ ਜਿਹਾ ਸਾਰਾ ਲਾਗੇ ਜਿਹੜਾ ਦੀਏ ਦੀਗੇ ਕਿਰਪਾ ਹੁੰਦੀ। ਬਾਕੀ ਜੋ ਰੋਦਾ ਹੀ ਭੇਜਾ ਨਾਲੇ ਦਾ ਹੀ। ਅੱਛਾ। ਪਰਹਰ ਛੋਡੀ ਪਧਾਰ। ਉਹ ਜਿੱਦੀ ਉਹ ਕ੍ਰਿਆ ਜਿਹੜਾ ਤਰਾਣੀਆਂ ਕੋ ਜੱਜੀਆਂ ਕੋ ਲਖੜੀਆਂ ਇਹਨਾਂ ਸਾਰੀਆਂ ਕੋ ਜੱਜੀਆਂ ਨੇ ਕੋ ਲਖੜੀਆਂ ਇਹਨਾਂ ਪੜਾਹ ਜੋੜੀ ਪਧਾਰ ਉਪਧਾਰ ਨਾਲ ਜੁੜੀਆਂ ਹੋਈਆਂ ਮਾਇਆ ਨਾਲ ਜੁੜੀਆਂ ਹੋਈਆਂ ਸਾਰੀਆਂ ਮਾਇਆ ਦੀਆਂ ਇਹਨਾਂ ਨਾਲ ਲੋਕਾਂ ਨੂੰ ਧੋਖਾ ਦੇਣ ਦੇ ਛੜਿਆ ਸਾਰੇ ਸਰਬ ਦਾ ਜੋੜਾ ਪਾਇਆ ਹੋਇਆ ਤੇ ਬੁੱਧੀ ਦੀ ਉਹ ਗੱਲ ਹੋ ਰਹੀ ਹੈ ਨਾ ਉਹ ਆਤਮਾ ਦੀ ਕਰਨਾ ਬੁੱਧੀ ਦੀ ਗੱਲ ਸਰੀਰ ਨਾਲ ਵਿਚਾਰਨ ਕੀ ਕਰਨ ਜਦਕੇ ਗੁਰਬਾਣੀ ਦੇ タルਬ ਦੇ ਵਿੱਚ ਵੇਖ ਵਾਸਤੇ ਕੋਈ ਜਗ੍ਹਾ ਹੀ ਨਹੀਂ ਵਿਖੀ ਕਿਸੇ ਵੀ ਵੇਖ ਵਾਸਤੇ ਕੋਈ ਜਗ੍ਹਾ ਨਹੀਂ ਠੀਕ ਖਾਲਸੇ ਦਾ ਵੀ ਵੇਖ ਨਹੀਂ ਵਰਦੀ ਹੈ ਸਾਡਾ ਸਪਾਸ਼ਾ ਦੇ ਕਾਲਪੁਰਖੀ ਫੌਜ ਕੇ ਹੈ ਵਰਦੀ ਹੁੰਦੀ ਹੈ ਰੂਪ ਇਹ ਨਹੀਂ ਕਹਿ ਸਕਦੇ ਜਿਹੜੇ ਵੇਖ ਕਹਿੰਦੇ ਨੇ ਦੇਖੋ ਬੁੱਧੀ ਹਿੱਤ ਉਹ ਵਿਆਰੇ ਪੁਰਾਣੇ ਸਿੱਖਿਆ ਗਿਆਨ ਦੀ ਹੈ ਸਾਦੀ ਪਹਿਰਾ ਹੈ ਸਾਡੀ ਵਰਦੀ ਹੈ ਵਰਦੀ ਖਾਸ ਉਪਰਸਪਾਈ ਜਾਂਦੀ ਹੈ ਇਹ ਵੀ ਗੱਲ ਹੈ 14 ਸਾਲ ਤੇ ਘੱਟ ਪਹਿਲਾਂ ਕਦੇ ਵੀ ਵਰਦੀ ਦੀ ਸਿਪਾਈ ਜਾਂਦੀ 14 ਸਾਲ ਤੇ ਬਾਅਦ ਹੀ ਸਾਲ ਆ 14 ਸਾਲ 12 ਹਿੱਸੇ ਦਾ ਬਾਲਪਨ ਬੀਤੇ ਹੈ ਵਰਦੀ ਤੁਸੀਂ ਕਿਵੇਂ ਫਾਦੋਗੇ ਬਾਲਪਨ ਦੇ ਵਿੱਚ ਤਰਫੋਂ ਤੋੜ ਕੇ ਵੀ ਕਰਾ ਦੋਗੇ 12 ਸਾਲ ਬਾਅਦ ਫਲਕੀ ਤੇ 20 ਸਾਲ ਕਚ ਸਥਾਪਨਾ ਕੀਓ 3 ਸਾਲ ਕਚ ਦੇਵਨਾ ਪੂਜਾ ਅਬ ਪਛਤਾ ਨਾ ਫਿਰ ਤੇ ਪਿਓ ਜੇ 12 ਸਾਲ ਤੱਕ ਤਾਂ ਵਰਦੀ ਪਾਏ ਦੀ ਨਾ ਸਕਦੇ 6 ਜਿਹੜਾ ਹਰਸਾਂ ਦੇ ਵਰਦੀ ਸੀਗੀ ਹਜੀਤਾਂ ਦੇ ਤਾਂ ਜੰਗ ਕੀਤੀ ਹੈ ਉਹਨਾਂ ਨੇ ਜੋਰਾ ਵਾਲਾ ਫਤਿਹ ਸੰਦੇ ਵਰਦੀ ਨਹੀਂ ਸੀ ਜੰਗ ਨਹੀਂ ਕੀਤੀ ਕਿ ਵਰਦੀ ਉਹ ਜੰਗ ਕਰਦੇ ਹੋ ਵੀ ਐਵੀ ਸੀ ਉਹਨਾਂ ਦੇ ਕਹੇ ਤੇ ਜੂਝ ਖੜੇ ਹੁੰਦੇ ਜਿਵੇਂ ਉਹ ਕਹੇ ਤਾਂ ਖੜੇ ਹੋ ਜੂਝ ਤਲਵਾਰਾਂ ਤੂਫੇ ਪੈ ਜਾਂਦੇ ਫੌਜੀ ਨਹੀਂ ਸੀ ਅਜੇ ਨਹੀਂ ਸੀ ਉਹ ਲੋਕ ਬਨੇ ਨਹੀਂ ਲੜਨ ਤਾਂ ਲੜਨਾ ਕੋ ਫੌਜੀ ਨੂੰ ਦਾ ਲੈਨੇ ਵੀ ਉਹ ਕਰਦੇ ਨੇ ਕਹਿੰਦੇ ਨੇ ਫੌਜ ਇਕੱਠੀ ਕਰਾਂਗੇ ਜਦ ਹੋਊਗਾ ਟਾਰਗੇਟ ਹੋਈ ਐ ਪਰ ਉਹ ਵੀ ਉਹ ਹੋ ਜਪ ਕਰਾਂਗੇ ਕਰਾਂਗੇ ਕਰਾਂਗੇ ਟਾਈਮ ਆਇ ਤੇ ਕਰਾਂਗੇ ਹਾਂ ਅੰਦਰੇ ਰਹਦਾ ਅੰਦਰਲਾ ਰਹਦਾ ਦਸਤ ਹੈ ਪਈਏ ਮਲ ਅੰਤਰ ਪ੍ਰਗਾਸ ਮਤ ਉੱਤਮ ਹੋਵੇ ਹਰ ਜਪ ਗੁਣੀ ਗਈ ਜੇ ਡਲ ਪੈ ਜਾ ਦਾ ਹੁਕਮ ਨਾਲ ਦੀ ਹੁਕਮ ਉਹ ਜਵਣ ਜੇ مارنا یاد رہے تے دنیا نالو اتے ہی کٹ لینداں توڑ لینداں ورنہ تاں بھولو بس رہیا ہویا کنا بھائی جی ڈوری کھچ کے توڑنی ہے اودو تکلیف ہو پے نہیں ہولی ہولی کرنا کھول لو اور لنج بنی ہوئی ہے زنجیر بنی ہوئی ہے ٹائم نیڑے آ گیا انہاں نے توڑنی ہے انہاں دا ٹینسل لینا ٹریکٹر دے ਉਹ ਆ ਜਾਊਗਾ ਤੇ ਟੂ ਟੂ ਵੀ ਖਬਰਾਂ 100 ਕਿਲੋਮੀਟਰ ਤੇ ਜਾ ਕੇ ਟੁੱਟੇ ਪਿਆਇਨਾ ਫੋਲ ਕੇ ਰੱਖ ਦਿੱਤੇ ਟਰੈਕਟਰ ਦੀ ਜੀ ਉਹ ਖੱਟ ਗਿਆ ਜਿਹੜਾ 3 ਰੁਪਿਆ ਰਹਿ ਉੱਤੇ ਪੈ ਪਈਆ ਪੈ ਪਈ ਜਪੈਣਾ ਮਾਲ ਕੱਟੀ ਫੇਰ ਟੱਕਿਆ ਜਾਂਦਾ ਢੱਕ ਲੈਂਦਾ ਸੰਸਾਰ ਨੂੰ ਤੋੜ ਲੈਂਦਾ ਅਬਲ ਸੰ ਤੋੜ ਲੈਣਾ ਕਰੋ ਪਤਾ ਵੀ ਤੋੜ ਨਹੀਂਦਾ ਹੁਣ ਇਹਨਾਂ ਤੋਂ ਅਗਲੇ ਤੌਰ ਦੇਣਗੇ ਮਾਇਆ ਕਰਕੇ ਜਿੰਨਾ ਜੇ ਮਾਇਆ ਨਾਲ ਜੁੜਿਆ ਆ ਮਾਇਆ ਨਾਲ ਜੇ ਮਾਇਆ ਕੱਟੀ ਜੇ ਤਬਸ ਵੀ ਕੱਟਿਆ ਗਿਆ ਹਾਂਜੀ ਨਿਰਮਲ ਹੋਵੇ ਸ਼ਰੀਰ ਨਿਰਮਲ ਹੋਵੇ ਸ਼ਰੀਰ ਬੇਦਲ ਨਿਰਮਲ ਸ਼ਰੀਰ ਹੋ ਜਾਂਦਾ ਜੇ ਮਾਇਆ ਛੱਡ ਦਿੰਦਾ ਮਾਨਸ ਕਾਮ ਕ્રોਧ ਲੋਭ ਹੰਕਾਰ ਪਰਮ ਛੱਡ ਦਿੰਦਾ ਸ਼ਰੀਰ ਨਿਰਮਲ ਹੋ ਜਾਂਦਾ ਉਹ ਦਾ ਸ਼ਰੀਰ ਹਲਾਤ ਹੋ ਗਿਆ ਆਸ੍ਰੀ ਕਰਵਾ। ਸਰੀਰ ਨਾ ਗੁਜਰੀ ਨਾ ਸ਼ਰੀਰ ਆਪਣਾ ਕਰ ਲਿਆ। ਇਹ ਹਿਰਦੇ ਦੀ ਗੱਲ ਹੋ ਰਹੀ ਹੈ ਜੀ। ਬੁੱਧ ਨਾਲ ਸ਼ਰੀਰ ਦੀ ਗੱਲ ਹੈ, ਹਿਰਦਾ ਕਹ ਲੋ, ਜਾਂ ਕੁਛ ਕਹ ਜਿਹੜਾ ਅਸਲੀ ਸ਼ਰੀਰ ਉਹਦੀ ਗੱਲ ਹੋਈ। ਬਾਹਲਾ ਦਾ ਕੱਪੜਾ ਹੈ, ਬਾਹਲਾ ਕਿਹਦੇ ਸ਼ਰੀਰ ਹੈ? ਦੱਲਾ ਪਾਇਆ ਹੋਇਆ। ਹਾਂਜੀ। ਅੰਤਰ ਪ੍ਰਗਾਸ ਮਤ ਊਤਮ ਹੋਵੇ, ਹਰ ਜਪ ਗੁਣੀ ਗਈ। अंतर प्रकाश है प्रकाश नहीं है प्रकाश बाहर होता है प्रकाश खाना दिन अंतर अंतर प्रकाश प्रकाश ज्ञान का होता है और बिना खा दो दिन होता है प्रकाश की रोशनी के बिना आंखें देख अंतर प्रकाश मत उत्तम होवे हर जप ਮਤ ਉੱਤਮ ਹੋਵੇ ਜੇ ਅੰਦਰ ਪ੍ਰਕਾਸ਼ ਹੋ ਜਾਏ ਉਦੋਂ ਪਰਮਤ ਕੋਈ ਨਹੀਂ ਹੈ ਮਤ ਉੱਤਮ ਹੋਵੇ ਉਹ ਚਿਤੰਬਤ ਹੋ ਜਾਂਦੀ ਹੈ ਬਵੇਗ ਬੁੱਧੀ ਹੋ ਜਾਂਦੀ ਹੈ ਠੀਕ ਹੈ ਹਰ ਜਪ ਗੋਣੀ ਜਪਦਾ ਕੋਣੀ ਕੀਰ ਹੋ ਜਾਂਦਾ ਹੈ ਕੋਣੀ ਕੌਣ ਹੈ ਫਕੀਰ ਤੋਂ ਉਪਰਲੀ ਡਿਗਰੀ ਆਖਰੀ ਡਿਗਰੀ ਹੈ ਗਿਆਨਵਾਨ ਉਹ ਫਕੀਰ ਸਰਵ ਗਿਆਨਵਾਨ ਕਹਿੰਦੀ ਫਕੀਰ ਆ ਜਿਹੜਾ ਧਿਆਨ ਹੀ ਆ ਉਹ ਗੁੜੀ ਗਹਿਰ ਇਕ ਤਾਂ ਗਿਆਨੇ ਆ ਧਿਆਨ ਦੋਵੇਂ ਪਾਸੇ ਰੱਖਦਾ ਲੱਡੂ ਦਵਾਤਾ ਹਤਾ ਚਾਹੁੰਦਾ ਗਿਆਨ ਹੈਗਾ ਇਕ ਤਾਂ ਧਿਆਨ ਹੀ ਹੈ ਕਿ ਧਿਆਨ ਹੈ ਜਿਸਕੇ ਹਿਰਦੇ ਤਨਵਾਸੇ ਤੇਸਕਾ ਨੋ ਫਕੀਰ ਜੀ ਦੇ ਹਿਰਦੇ ਚ ਕਿਆ ਵਸਦਾ ਨਾ ਗਿਆਨ ਕਾ ਨੋ ਫਕੀਰ ਜਿਸਕੇ ਹਿਰਦੇ ਤੂੰ ਵਸੇਲ ਤੇਨਰ ਗੁੜੀ ਦੀ ਹੀਰ ਜਿਤੇ ਤੂੰ ਬਲਕਾਂ ਤੇ ਤੋਤੇ ਅੰਫਰ ਕੀ ਨਾ ਆੜ ਜੂ ਜੇ ਫਿਰ ਤੇ ਆ ਠੀਕ ਹੈ ਭੈ ਵਿੱਚ ਬੈਠਾ ਪੈ ਰਹਿ ਪੈ ਵਿੱਚ ਕਮਾਵੈ ਕਾਰ ਇੱਥੇ ਸੁਖ ਵਡਿਆਈਆਂ ਦਰਗਾਹ ਮੁਖ ਦਵਾਰ ਵਹੰਦੀ ਐ ਪੈ ਵਿੱਚ ਤੁਰਦੀ ਐ ਪੈ ਵਿੱਚ ਕਰਦੀ ਐ ਪੈ ਬੋਲਦੀ ਐ ਪੈ ਵਿੱਚ ਪੈ ਵਿੱਚ ਬੈਠਾ ਪੈ ਰਹਿ ਪੈ ਰਹਿ ਪੈ ਜਰਦੀ ਐ ਪੈ ਵਿੱਚ ਕਮਾਵੇ ਕਾਰ ਆਪ ਸੈਵਿਕ ਕਮਰਾਕਾਰ ਕਿੰਨੇ ਬੜੀ ਔਖੀ ਚੁਗੀ ਐ ਖਾਣ ਬੜੀ ਔਖੀ ਚੁਗੀ ਆ ਰੇਤ ਵਿੱਚੋਂ ਇਹ ਨਾ ਰੇਤੇ ਪੈਜੂ ਰਿਐਕਟ ਹੋ ਸੱਚ ਖਾਣ ਪੋ ਜਾ ਕੇ ਤੇ ਦੋ ਦਾਣੇ ਜੇ ਪੈਗੇ ਜੋ ਜੋ ਨੇੜੇ ਨੂੰ ਜਾਂਦੀ ਆ ਤੇ ਉੱਥੋਂ ਜ਼ਿਆਦਾ ਵਾਧਾ ਜਾਂਦਾ ਵੀ ਹੁਣ ਨਾ ਪੈ ਜਾ ਆਹ ਜਾਂਦੀ ਐ ਬਾਦ ਭੂਕ ਭੂਕ ਪੈ ਲਖਣਾ ਪੈਂਦਾ ਇੱਥੇ ਸੁਖ ਵਡਿਆਈਆਂ ਦਰਗਾਹ ਮੁਖ ਦਵਾਰ ਇੱਥੇ ਸੁਖ ਇੱਥੇ ਦਾ ਸੁਖ ਇੱਥੇ ਅਸਲ ਸੁਖ ਦੁੱਖ ਵੀ ਸੁਖ ਹੈ ਇੱਥੇ ਸੁਖ ਨੂੰ ਸੁਖ ਹੈ ਕੇ ਮੈਂ ਨਾ ਮੈਂ ਹਾਂਜੀ ਸੱਤੀ ਦਵੀ ਦੇ ਬੈਠੇ ਆਏ ਨੂੰ ਅਗਲਾ ਕਹਿੰਦਾ ਸੁਖ ਹੈ ਮਾਰਾ ਚੱਲਦਾ ਫਰੀਦ ਤੇ ਸੁਖ ਹੈ ਠੀਕ ਹੈ। ਆਹ ਉਹ ਤਾਂ ਦਰੂਆ। ਐਕ ਤੇ ਵਾਲਾ ਦੁੱਖ ਦਰੂਆ। ਸੁਖਿਆ। ਉਹ ਜਿਹਨੂੰ ਦੁਆ ਮਿਲ ਜਾਂਦਾ, ਦੁਆ ਲੱਗ ਜਾਂਦੀ ਹੈ ਬਿਮਾਰੀ ਨੂੰ ਉਹਨੂੰ ਸੁਖਾ ਵੀ ਜਿਹਨੂੰ ਦੁਆ ਨਹੀਂ ਮਿਲਦੀ ਇਹਨਾਂ ਉਹਨੂੰ ਸੁਖਾ। ਮਰ ਜਵੇ। ਫੇਰ ਕਾਦਵੇਂ ਬਿਮਾਰੀ ਦੇ ਵਿੱਚ ਮਰ ਜਾਂਦਾ। ਇੱਕ ਦੀ ਬਿਮਾਰੀ ਕੱਟੀ ਜਾਂਦੀ ਹੈ, ਦੁਆ ਮਿਲ ਜਾਂਦੀ ਹੈ। ਜਿਹਦੀ ਬਿਮਾਰੀ ਕੱਟੀ ਜੇ ਦੁਆ ਮਿਲ ਕੇ ਸੁਖੀ ਉਹ ਹੈ ਜਿਹਨੂੰ ਦੁਆ ਮਿਲੀ ਨਹੀਂ ਉਹ ਸੁਖੀ ਇਹ ਜੈਨ ਦਾ ਸੁਖ ਸੁਖ ਤਾਂ ਓខਾ ਕਰਦਾ ਜਮਾ ਸਰੀਰਿਕ ਤਾਂ ਨਹੀਂ ਆਤਮਿਕ ਜੇ ਪੱਧਰ ਤੇ ਦੇਖੀਏ ਤਾਂ ਸੁਖ ਮਿਲਦਾ ਹੈ ਜੀ ਹੀ ਆ ਲੋਕ ਤਾਂ ਸਰੀਰ ਤੇ ਖੜੇ ਨੇ ਜਿਹੜਾ ਟੱਪੜੀਆਂ ਕਰਦੀਆਂ ਦਾ ਸੁਣਨਾ ਉਹ ਤਾਂ ਕਿੱਥੇ ਜਾਂਦੇ ਹੁੰਦੀ ਹੈ ਉਹ ਸਰੀਰ ਤੇ ਖੜੇ ਨੇ ਗਰਗਹ ਮੋਖ ਦੁਆਰ ਦਰਗਾਹ ਦੇ ਵਿੱਚ ਜਮੰਦੀ ਜਾਣ ਜਮੰਦੀ ਹੋਰ ਵਾਸਤੇ ਮੁਕਤ ਦਵਾਰ ਸੰਕੁਰਾ ਹੋ ਗਿਆ ਐਜੇ ਆਓ ਜਾਓ ਕਿੱਧਰ ਚੱਲੇ ਜਿਉਂ ਚੱਲੇ ਆ ਘੜੀ ਘੜੀ ਜਾਂਦਾ ਉੱਥੇ ਕੋਈ ਦਵਾਰੇ ਦੀ ਜਣ ਠੀਕ ਹੈ ਜੀ ਕੋਈ ਕੁਛ ਨਹੀਂ ਭੈ ਤੇ ਨਿਰਪਉ ਪਾਈ ਹੈ ਮਿਲ ਜੋਤੀ ਜੋਤ ਆਪਾਰ ਇਹ ਜਿਹੜੀ ਭਾਇ ਬੁੱਧੀ ਹੈ ਨਾ ਅਸੀਂ ਭੈਣਾਂ ਦੇ ਕੇ ਚੱਲੇ ਹੋਏ ਆ। ਸਾਬ ਰਹਿਣਾ, ਸਾਬ ਵਿੱਚ ਬੋਲਣਾ, ਹੁਕਮ ਜਰਾਣਾ, ਇਹ ਤੇ ਨਿਰਭਉ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਕੋ ਕੌਣਾ, ਫਿਰ ਕੋ ਹੁਕਮ। ਠੀਕ ਹੈ। ਮਿਲ ਨਿਰਭਉ ਜਪਾ ਸਦਲ ਘੋ ਬਟਾ। ਕੋਲ ਕਰ ਪਾ ਤੇ ਪ੍ਰਾਣੀ ਛੁਟਿਆ। ਇਹਨਰਪਉ ਨੂੰ ਜਪਿਆ ਉਹਦਾ ਸਦਲ ਪਉ ਮਿਟ ਗਿਆ ਭੈ ਤੇ ਨਿਰਪਉ ਪਾਈਏ ਮਿਲ ਜੋਤੀ ਜੋਤਪਾਰ ਅ ਜਿਹੜੀ ਪਾਇਆ ਨਾ ਅਸੀਂ ਪੈ ਵਸਾਈ ਹੈ ਹਿਰਦੇ ਚ ਤੇ ਨਿਰਪਉ ਨਾ ਬਣੀ ਰਹੂ ਨਿਰਪਉ ਜੇ ਪੈ ਟੁੱਟ ਗਈ ਕਿਤੇ ਤੇ ਪੰਜਿਆ ਰਹ ਜਾਂ ਠੀਕ ਹੈ ਜੋਤ ਅਪਾਰ ਜੋਤੀ ਮਲ ਕੇ ਜੋਤ ਨੂੰ ਕੋਲੇ ਪਾਸੇ ਲੈ ਜਾਂਦੀ ਹੈ ਸਾਚ ਗੜੀ ਵੀ ਜੋਤੀ ਜੋਤੀ ਜਦ ਮਿਲਦੀ ਹੈ ਨਾ ਜੋਤ ਨੂੰ ਇਧਰੋਂ ਪਲਟਾ ਕੇ ਮਾਇਆ ਬਣੋ ਸਾਚ ਗੜਣ ਵੱਲ ਲੈ ਜਾਂਦੀ ਜੋਤ ਨੂੰ ਅਪਾਰ ਜਿਦਾ ਪੱਲਾ ਪਸਾ ਨਹੀਂ ਉਹਦਾ ਜੋੜ ਦਿੰਦੀ ਐ ਸਰਬ ਵਿਆਪੀ ਕਰ ਦਿੰਦੀ ਐ ਇਹ ਸ਼ਬਦ ਨਾਲ ਜੋੜ ਦਿੰਦੀ ਐ ਸ਼ਬਦ ਦਾ ਦੀ ਸ਼ਬਦ ਦਾ ਸਰਬ ਵਿਆਪੀ ਐ ਨਾਨਕ ਖਸਮੇ ਭਾਵੇ ਸਾਹ ਭਲੀ ਜਿਸ ਆਪੇ ਬਖਸ਼ੇ ਕਰਤਾਰ ਨਾ ਗਜ਼ਰਾ ਭਾਵੇ ਸਾਹ ਭਲੀ ਨਾ ਤਾਂ ਦਾ ਜਿਹੜਾ ਤੁਸ ਕਹਣਾ ਸੀ ਕਹਾਇਆ ਸਾਥ ਕਹਿਤਾ ਇਹੀ ਗੱਲ ਉਹਨਾਂ ਨੇ ਕਹਾਈ ਹੈ ਖਸੂਬੀ ਭਾਵੇ ਸੋ ਭਲੀ ਖਸੂਬੀ ਜਿਹੜੀ ਪਉਂਦੀ ਹੈ ਉਹੀ ਭਲੀ ਹੈ ਜਿਹੜੀ ਖਸੂਬੀ ਨਹੀਂ ਪਉਂਦੀ ਉਹਨੂੰ ਚੰਗੀ ਨਹੀਂ ਕਿਹਾ ਜਾ ਕੋਈ ਵੀ ਗੁਰੂ ਘਰ ਚ ਵੀ ਸੀ ਚਾਹੇ ਭਗਤਾਂ ਨੇ ਕਰ ਸੀ ਨਾ ਦੀ ਉਸ ਵਿੱਚ ਭਾਵੇ ਸਾਪ ਭਲੀ ਜਿਸ ਨੂੰ ਆਪੇ ਬਖਸ਼ੇ ਕਰਤਾ ਜਿਸ ਆਪੇ ਰੱਖਿਆ ਕਰਤਾ ਬਖਸ਼ਿਸ਼ ਕਰਤਾ ਨਹੀਂ ਕਰਦੀ ਬਕਸ਼ਿਸ਼ ਨਹੀਂ ਕਰ ਸਕਦਾ ਘਰ ਵਾਲਾ ਕੁਝ ਵੀ ਬਕਸ਼ਿਸ਼ ਕੁਝ ਨਹੀਂ ਕਰ ਸਕਦਾ ਪਰ ਇਹ ਤਾਂ ਸੰਦਰਾ ਵੀ ਹਾਂ ਐ ਹੈ ਭਲੀ ਹੈ ਠੀਕ ਹੈ ਭਲੇ ਬੋਲੇ ਦੀ ਪਛਾਣ ਤਾਂ ਕਰ ਸਕਦਾ ਖੋਤੇ ਖਰੇ ਦੀ ਪਛਾਣ ਤਾਂ ਗੁਰਮੁਖ ਨੂੰ ਆ ਬਕਸ਼ਿਸ਼ ਦੀ ਕੁਝ ਕਰ ਸਕਦਾ ਉਹਨੂੰ ਬਿਚਾਰੇ ਉਹ ਕੀ ਹੈ ਉਹਦਾ ਆਪ ਮਹਲਾ 3 ਸਦਾ ਸਦਾ ਸਲਾਹੀਏ ਸੱਚੇ ਕੋ ਬਲ ਜਾਓ ਨਾਨਕ ਏਕ ਛੋੜ ਦੂਜੇ ਲੱਗੈ ਸਾ ਜਹਿਵਾ ਜਲ ਜਾਓ ਸਦਾ ਸਦਾ ਸਲਾਹੀਏ ਸੱਚੇ ਰੂਹ ਬੇਸ਼ੈ ਸਲਾਉਂਦੇ ਰਹੀਏ ਸੱਚੇ ਰੂਹ ਅੱਕਦਾ ਹੀ ਜੀ ਕਿਉਂਕਿ ਜੀ ਦੀ ਅੱਕਦਾ ਇੱਕ ਨੂੰ ਸਦਾ ਸਦਾ ਸਲਾਹੀਏ ਸੱਚੇ ਕੋ ਬਲ ਜਾਉ ਇਸ ਕਰਕੇ ਬਲੇ ਉਹਦੀ ਸਿਰਫ ਸਲਾਹ ਕਰੀ ਜਾਣਾ ਸਭਾ ਮੇਰਾ ਜੀ ਜਦ ਸਲਾਹ ਚ ਜੁੜਦਾ ਜਾਂਦਾ ਜੁੜਦਾ ਹੀ ਜਾਂਦਾ ਜੁੜਦਾ ਹੀ ਜਾਂਦਾ ਰਸ ਵਧਦਾ ਹੀ ਜਾਂਦਾ ਨਹੀਂ ਆਦਮੀ ਦੀ ਸਿਰਫ ਸਲਾਹ ਕਰੀਏ ਰਸ ਘਟਦਾ ਹੀ ਜਾਂਦਾ ਘਟਦਾ ਹੀ ਜਾਂਦਾ ਘਟਦਾ ਹੀ ਜਾਂਦਾ ਇਹ ਪਤਾ ਜੀ ਕੀ ਜਾਤੂ ਇਹ ਨਹੀਂ ਸਮਝ ਆਇਆ ਤਾਂ ਸੱਚੇ ਗਏ ਬਲ ਠੀਕ ਹੈ ਨਾਨਕ ਇੱਕ ਛੋੜ ਦੂਜੇ ਲੱਗ ਸਾ ਜਲ ਜਾਊ ਨਾਨਕਾਏ ਵਿਛੜ ਦੁਦਿਏ ਲਗੇ ਜੇ ਸੱਚ ਨੂੰ ਛੱਡ ਕੇ ਸੱਚਕ ਛੱਡ ਦੀ ਸਲਾਹ ਨੂੰ ਛੱਡ ਕੇ ਹੋਰ ਕਿਸੇ ਵੀ ਜਿਹੜਾ ਸੱਚ ਨੇ ਪੈਦਾ ਕੀਤਾ ਸੱਚ ਤੋਂ ਪੈਦਾ ਹੋਇਆ ਹੋਇਆ ਉਹਦੀ ਸਿਰਸਲਾ ਕਲਮਾ ਜੀਏ ਉਹ ਸਾਜਿਬਾ ਜਉ ਜਉ ਉਹਨਾਂ ਦਾ ਖਿਆਲ ਆ ਸਿੱਖਾਂ ਨੇ ਕਹਿ ਦੀ ਹੋ ਬਚੀ ਹੋਣੀ ਆਈ ਦੀ ਸਾਰਿਆਂ ਦੀ ਜੀਵ ਜੜੀ ਪਈ ਐ ਖਰਾ ਪ੍ਰਸ਼ਾਦ ਦਾ ਛੱਡ ਕੇ ਕਾਹੀ ਜੀਵ ਜਲ ਗਈ ਸ਼ੂਗਰ ਹੋ ਗਈ ਕੋਈ ਬੰਦਾ ਬਚਿਆ ਹੋਇਆ ਦਿਖਾਓ ਜਿਹੜਾ ਦੂਜੇ ਦੀ ਨਹੀਂ ਕਰਦਾ ਕੋਈ ਰੱਲਾ ਹੋਊਗਾ ਜਿਹੜਾ ਹੈ ਉਹ ਬੋਲਦਾ ਉਹ ਕੱਟਾ ਉਹ ਤਾਂ ਵੀ ਬੋਲਦਾ ਹਲੇ ਬਜਾਰ ਗਰਬ ਦੋਆਂ ਦਾ ਕੂੜ ਫਰੇ ਪ੍ਰਧਾਨਵੇ ਲਾਲੋ ਉਹ ਕਹਿੰਦਾ ਕਾਨੂੰ ਪ੍ਰਣਾ ਲੈ ਕੇ ਕਰਜਟ ਮਾਰ ਦਈਏ ਪਹਿਲਾਂ ਕੋਈ ਵਰਤਾ ਤਾਂ ਹੈ ਕੋਈ ਨਾ ਕੋਈ ਮਾਰ ਨਹੀਂ ਤਾਂ ਪੈਂਦੀ ਆ ਭਾਜੀ ਨੂੰ ਮਜਬੂਰ ਕਰਦਾ ਉਹ ਮਾਰਦਾ ਠੀਕ ਹੈ ਜੀ ਜੇ ਮਜਬੂਰ ਕਰਦਾ ਉਹ ਮਾਰਦਾ ਵੀ ਤੂੰ ਆਰ ਵੀ ਮਾਰਦਾ ਕਿਵੇਂ ਪੈਂਦੀਆਂ ਨੇ ਫੇ ਸਾਰੇ ਹੀ ਮਾਲ ਲੱਗ ਜਾਂਦੇ ਨੇ ਪਿੱਛੋਂ ਕੌੜੀ ਅੰਤ ਸਵਤਾਰ ਉਪਾਇਨ ਭਾਉ ਦੂਜਾ ਕੀਆ ਜੋ ਰਾਜੇ ਰਾਜ ਕਮਾਂਦੇ ਦੁੱਖ ਸੁਖ ਪਿੜੀ ਆ ਅਸਾ ਉਤਾਰ ਉਪਾਇਨ ਅਸਾ ਉਤਾਰ ਕੀਨੇ ਭਾਜਲਾ ਸ਼ਰੀਰ ਨ ਜੀਵ ਮਨ ਜੀ ਤ੍ਰੀਤ ਕਰਕੇ ਪੈਦਾ ਹੋਇਆ ਅੰਤ ਸਵਤਾਰ ਇਹਨੂੰ ਕਹਿੰਦੇ ਨੇ ਹੋਰ ਆਮ ਕੀ ਆਸਾ ਹੋਰ ਆਮ ਕੀ ਆਸਾ ਪੈਦਾਦੀ ਕੀਤਾ ਜੰਮਿਆਂ ਦੀ ਹੋਇਆ ਏ ਦੇਹ ਹੀ ਧਾਰੀ ਫਿਰਦਾ ਠੀਕ ਹੈ ਇਹਦਾ ਫੌਜਾਂ ਬਣਾਈ ਫਿਰਦਾ ਇਹਦਾ ਵਾਛਦੀਆਂ ਹੁੰਦਾ ਇਹਦਾ ਬਣਿਆ ਫਿਰਦਾ ਇਹਦਾ ਰਬੂ ਸਾਡੀ ਮੇਂਦ ਤੋਂ ਲੈ ਜਾਓ ਜੁੱਤੇ ਦਰਗਾਹ ਦੇ ਇਹ ਆਸਾ ਉਤਾਰ ਆਸਾ ਉਤਾਰ ਕੇ ਤੇ ਚਾਇਨਾ ਬਣਾਏ ਤੇ ਜਾਂਦੇ ਕਿੰਨੇ ਕਰਨੇ ਜੇ ਨਾ ਜੀਤ ਨਾ ਸਾਰੇ ਹੰਸਾ ਉਤਾਲ ਦੇ ਤੁਸਤ ਉਤਾਲੋਂ ਪਾਇਆ ਨਾ ਭਾਉ ਦੁਜਾ ਕੀਆ ਭਾਉ ਦੁਜਾ ਕੀਆ ਸਾਰਿਆਂ ਦਾ ਹੀ ਭਾਉ ਦੁਜਾ ਵਾਇਜ ਫਸੇ ਨੇ ਨਾ ਢਿੱਡ ਹੋਏ ਨੇ ਜਿਉਂ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਪੀੜੀ ਆ ਜਿਉਂ ਰਾਜੇ ਰਾਜ ਕਮਾਉਂਦੇ ਦੁਨੀਆ ਦੇ ਰਾਜੇ ਰਾਜ ਕਮਾਉਂਦੇ ਨੇ ਜੋ ਸੋ ਵੀ ਭਿੜਦੇ ਨੇ ਉਹ ਦੁਕਾਨ ਸੁੱਖਾਂ ਨੇ ਬਦਲਦੇ ਨੇ ਸਾਰੇ ਸਾਰੀਆਂ ਹੋਰ ਦੁਕਾਨ ਸੁੱਖਾਂ ਨੇ ਬਦਲਦੇ ਰਹਿੰਦੇ ਨੇ ਇਹ ਭਿੜ ਚੱਲਦਾ ਰਹਿੰਦਾ ਉਹਨਾਂ ਦਾ ਆ ਪੋੜ ਬਣਾ ਦਿਓ ਸੜਕਾਂ ਚੌੜੀ ਕਰ ਦਿਓ ਫੇਰ ਟ੍ਰੈਫਿਕ ਜਮ ਹੋ ਗਈ ਭਿੜਦੇ ਹੀ ਨੇ ਉਸ ਕੀ ਕਰਦੇ ਨੇ ਸਾਰਾ ਦਿਨ ਪੋੜਵਾਦੀ ਬਦਗੀ ਹੋਰ ਕੀ ਕਰੀਏ ਸਾਰਾ ਦਿਨ ਇਹੀ ਭਿੜ ਚੱਲਦਾ ਇਹਨਾਂ ਦਾ ਹੋਰ ਕੀ ਚੱਲਦਾ ठीक है जी ईश्वर ब्रह्मा सेव दे अंत तिनी न लहीया ईश्वर ब्रह्मा ये ने धर्म का आदमी ईश्वर ब्रह्म हां जी ईश्वर दा हैगा राजा ईश्वर राजा प्रमा है ब्रह्मा हैगा विद्वान हुंदा खरीदेया होया ब्राह्मण भी दे ओदे दरबार दरबारी भी है ਉਹਨਾਂ ਸਲਾਹਕਾਰ ਵੀ ਹੈ ਗੁਰੂਆਂ ਦਾ ਬੜਾ ਲੱਗਿਆ ਜੋ ਹੈ ਉਹ ਰਾਜੇ ਦਾ ਕੰਮ ਹੀ ਚੱਲਦਾ ਬੜਾ ਲੱਗਿਆ ਮੈਨੂੰ ਈਸ਼ਰ ਬ੍ਰਹਮਾ ਸੇਵਦੇ ਈਸ਼ਰ ਬ੍ਰਹਮਾ ਵੀ ਤੈਨੂੰ ਸੇਵਦੇ ਨੇ ਪਰ ਇੱਥੇ ਸ਼ਿਵ ਜੀ ਚੜਤਾ ਸ਼ਿਵ ਜੀ ਹੱਥ ਤੋਂ ਇਹ ਈਸ਼ਰ ਬ੍ਰਹਮਾ ਨੂੰ ਲੋਕ ਸੇਵਦੇ ਆ ਕਿ ਈਸ਼ਰ ਬ੍ਰਹਮਾ ਅੱਗੇ ਕਿਸੇ ਨੂੰ ਸੇਵਦੇ ਆ ਕੀ ਭਾਵ ਹੈ ਜੀ ਈਸ਼ਰ ਬ੍ਰਹਮਾ ਤੈਨੂੰ ਸੇਵਦੇ ਨੇ ਜੇ ਜੇ ਗੱਲ ਚੱਲਦੀ ਹੈ ਇਸਤ ਪਰਮਾਤਮਾ ਦੀ ਤਾਂ ਗੱਲੇ ਵੀ ਚੱਲੀ ਆ ਨੇ ਇੱਥੇ ਗੱਲ ਤੇ ਕੇ ਪ੍ਰਸੰਗੀ ਦਾ ਚੱਲਦਾ ਜਿਹੜਾ ਪ੍ਰਸੰਗ ਚੱਲਦਾ ਉਹ ਨੂੰ ਸੈਵਦੇ ਨੇ ਵੀ ਅੱਛਾ ਜੀ ਇਹ ਜਨਮ ਲੈ ਲਿਆ ਵੀ ਆਂਸਾਵਤਾਰ ਵਿੱਚ ਆਂਦੇ ਰਾਜੇ ਵੀ ਇਹ ਬੇਸਿਕ ਨੌਲੇਜ ਹੈ ਕਰਪਤੀ ਹੂੰ ਵਿਝਰੇ ਵਾਲਿਆਂ ਨੇ ਪੁੱਛਿਆ ਇਹਨਾਂ ਨੇ ਕਿਥੋਂ ਬਣੀ ਧੀਏ ਬੇਸਿਕ ਨੌਲੇਜ ਬੇਸਿਕ ਨੌਲੇਜ ਮੈਨਾਂ ਕਿਵੇਂ ਅਰਥਾ ਲਵੂ ਵੀ ਤੁਸੀਂ ਇਹਨੂੰ ਤੇ ਮੈਂ ਇਹਦੀ ਬੋਲੀ ਨਹੀਂ ਸਮਝਉਂਦੀ ਕਿਉਂਕਿ ਮੈਨੂੰ ਐ ਲੱਗਦਾ ਨੇ ਭਲੇਖਾ ਨੂੰ ਲੋਕ ਸੇਵਦੇ ਪੈ ਰਹੇ ਹਨ ਹਾਣੂਨ ਸੇਵਦੇ ਨੇ ਆਸਪਤਾਲ ਦਾ ਉਹ ਵੀ ਅੱਛਾ ਜੀ ਬ੍ਰਹਮਾ ਵੀ ਜੋ ਪੈਦਾ ਹੋਇਆ ਹੈ ਸੰਸਾਰ ਵਿੱਚ ਸਰੀਰ ਧਾਰੀ ਬੇਸਾਰੀ ਉਹ ਹੰਸਾ ਅਵਤਾਰ ਇਹ ਕਹਿ ਕੇ ਚੱਲਿਆ ਮੈਂ ਉਹੀ ਤਾਂ ਦੇਹ ਧਾਰੀ ਉਹ ਠੀਕ ਹੈ ਜੀ ਰਾਜੇ ਵੀ ਦੇਵਤਾਰੀ ਨੂੰ ਵੀ ਇਸ਼ਰ ਕਹਿੰਦੇ ਨੇ ਲੋਕ ਜੇ ਵੀ ਹੈ ਇਸ਼ਰ ਦਾ ਅ ਇਹਨਾਂ ਰਾਜੇ ਕਹਿੰਦਾ ਤਾਂ ਤਾਂ ਵੀ ਬੱਚੇ ਆ ਗਏ ਉਹ ਵੀ ਦੇਵ ਦੇ ਇਤਰਾ ਗੁੜੀ ਮਾਇਆ ਦਾ ਬਿਸਨ ਬਸਾਲਾ ਬਿਨਾਸ਼ਕਾਰੀ ਹੈ ਤਨੇ ਕਿ ਕਿਸ਼ਵ ਭਏ ਇੱਕ ਗਏ ਇੱਕ ਫੇਰ ਭਏ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਪੀਅ ਦੇਖ ਹੈ ਇਹਨੂੰ ਹਦੀ ਕੌਣ ਸੇਵ ਜਿਹੜੇ ਇਹਨਾਂ ਨੂੰ ਸੇਵਦੇ ਨੇ ਸੇਵੀ ਜਾਣ ਕਾਦੇ ਵਾਸਤੇ ਸੇਵਦੇ ਨੇ ਇਹਨਾਂ ਨੂੰ ਸੇਵਵਾ ਦਾ ਕੋਈ ਵੀ ਮੁਕਤੀ ਨਹੀਂ ਮਿਲਦਾ ਮੁਕਤੀ ਦਾ ਬਿਚਾਰੇ ਆਪ ਨੂੰ ਨੇ ਇਹਨਾਂ ਸ਼ਿਵ ਜੀ ਨੂੰ ਸੇਵਿਆ ਮੁਕਤੀ ਮੰਗੀ ਹੈ ਕਥਾ ਉੱਦੀ ਆਇਸੀ ਜੇ ਪ੍ਰਾਣ ਭਗਤਾ ਕੋਈ ਉਹਨੇ ਸ਼ਿਵ ਜੀ ਨੂੰ ਸ਼ੇਬੇ ਸ਼ਿਵ ਜੀ ਪ੍ਰਗਟ ਹੋਇਆ ਪ੍ਰਗਟ ਗਿਆ ਬਹੁਤ ਭਗਤ ਹੈ ਕਹਣਾ ਸ਼ਿਵ ਜੀ ਇੱਥੇ ਆ ਕੇ ਦਰਸ਼ਨ ਦੋ ਬੇਦੂ ਸ਼ਿਵ ਜੀ ਨੂੰ ਪਤਾ ਲੱਗਿਆ ਦਰਸ਼ਨ ਦੇ ਚਲਾ ਗਿਆ ਬਈ ਇੱਥੇ ਭਈ ਆ ਨਾ ਮੇਰਾ ਉਹਨੂੰ ਕਹਣਾ ਭਈ ਅੱਕਾ ਵਿੱਚ ਹੀ ਬੈਠਾ ਹੈ ਕੱਟਿਆ ਲਿਆਗਾ ਕੋਈ ਮੰਗ ਲਈ ਵਾਜੋ ਜ ਬੁੱਢਾਤਾ ਭਾਈ ਭਗਤਾ ਬੜੀ ਸੱਚਾ ਕੀਤੀ ਆਤਾ ਮੇਰੀ ਥੋੜੀ ਸ਼ਰਧਾ ਰੱਖੀ ਆਤਾ ਮੈਨੂੰ ਮੁਕਤੀ ਦੇ ਦੇ ਕਹਣਾ ਕਮੜਿਆ ਮੁਕਤੀ ਦਾ ਮੈਨੂੰ ਨਹੀਂ ਮਿਲਦੀ ਮੈਂ ਡੋੜਦਾ ਫਿਰਦਾ ਮੈਂ ਤੈਨੂੰ ਕਿਥੋਂ ਦੇਗਾ ਤੂੰ ਕੋਈ ਹੋਰ ਮੰਗਦਾ ਕਹਾਂ ਹੋਰ ਕੁਝ ਮੈਨੂੰ ਚਾਹੀਦਾ ਜੀ ਹੈਨਾ ਚਾਹੀਦਾ ਕਿਉਂ ਨਹੀਂ ਐਡੀ ਦੁਨੀਆਂ ਦੇ ਪੁਦਾਰ ਜੀ ਰਾਜ ਦੇ ਦੁਹੀ ਹੋਇਆ ਬੈਠਾ ਹੈ ਮੈਂ ਕਿਹਾ ਰਾਜੇ ਨੂੰ ਕਹਿਦਾ ਨਾ ਕਹਿੰਦੇ ਰਾਜੇ ਨਾ ਤੇਰੇ ਬੰਦੂਰੇ ਬਣਾ ਦੂਗਾ ਉਹ ਕਰ ਦੂਗਾ ਉਹ ਕਰ ਦੂਗਾ ਸੁਗਲਾ ਕਹੈਂ ਜੇ ਪੰਧ ਤੇ ਹੀ ਲਾਣਾ ਉਹ ਕਹਾਂਗਾ ਗੱਲ ਸੁਣ ਲੈ ਜੇ ਤਾਂ ਹੈ ਕਿ ਮੁਕਤੀ ਕੋਲ ਜੋ ਕਹਿ ਸਕਦਾ ਦੇ ਦੇ ਨੀ ਤੇ ਚੱਲ ਜਾ ਠੀਕ ਆ ਕਥਾ ਲਿਖੀ ਆ ਛੇਪੁਰਾਂਡ ਚ ਛੇਪੁਰਾਂਡ ਚ ਪਈ ਆ ਕਥਾ ਇਹ ਨੂੰ ਖਿਲਾਫ ਮੁਕਤੀ ਤੇ ਇਹ ਲੋਕਾਂ ਦੀ ਪੂਜਾ ਕਰਨ ਵਾਲੇ ਲੋਕ ਕਦੇ ਕਿਸੇ ਨਾਲ ਮੁਕਤੀ ਦੀ ਗੱਲ ਨਹੀਂ ਕਰਦੇ। ਮੁਕਤੀ ਦੇ ਹੱਕ ਚ ਨੇ ਮੁਕਤੀ ਦੇ ਖਿਲਾਫ ਨੇ। ਠੀਕ ਹੈ ਜੀ। ਈਸ਼ਰ ਤੋਂ ਸ਼ਿਵ ਜੀ ਲਵਾਂਗੇ ਫਿਰ। ਸ਼ਿਵ ਜੀ ਵੀ ਲੈ ਸਕਦੇ ਆ। ਉਹ ਆਪਣੇ ਆਪ ਰੋਜਾ ਬੁੱਧ ਹੈ। ਅੱਛਾ। ਜਿਹੜੂ ਆਪਣੇ ਆਪ ਰੋਜਾ ਬੰਦ ਦਾ ਸਦਾ ਈਸ਼ਰ ਵਾਸਤੇ ਆ ਜਾਂਦਾ ਦੇਖੋ ਨਾ ਉੱਥੇ ਈਸ਼ਰ ਬ੍ਰਹਮਾ ਦੇਵੀ। ਸੋ ਤੇਰੇ ਸਦਾ ਸਵਾਰੇ। ਇੱਧਰ ਇੰਦਰ ਆਸਣ ਉੱਥੇ ਇੰਦਰ ਆ ਗਿਆ ਉਹਦੀ ਜਗਾ ਨਾਲ ਤੇ ਜਗਾ ਕਿ ਕਹਿੰਦਾ ਬਿਜੋਨ ਦੀ ਜਗਾ ਇੱਧਰ ਆ ਜਾਂਦਾ ਰਾਜਾ ਯੋਗ ਵੀ ਇੱਧਰ ਵੀ ਮਿਰਪੋ ਨਿਰੰਕਾਰ ਅਲਖ ਹੈ ਗੁਰਮੁਖੀ ਪ੍ਰਗਟਿਆ ਮਿਰਪੋ ਜਪੈ ਹੈ ਨਿਰੰਕਾਰ ਨਾ ਪ੍ਰਗਟ ਕੀਤਾ ਗੁਰਮੁਖਾਂ ਦੇ ਗੁਰਮੁਖਾਂ ਨੇ ਉਹਦਾ ਦਰਸ਼ਨ ਕਰਵਾਇਆ ਲੋਕਾਂ ਨੂੰ ਅੱਖਾਂ ਨਹੀਂ ਕਰਵਾਇਆ ਬੁੱਧੀ ਦੇ ਲੈਵਲ ਦੀ ਬੁੱਧੀ ਸਮਝ ਆ ਗਈ ਕਰਤਾ ਜਿਉਂ ਦਾ ਗਿਆਨ ਪ੍ਰਚੰਡ ਹੋਇਆ ਉਹਨੂੰ ਸਮਝ ਆ ਗਈ ਉਹਨਾਂ ਨੂੰ ਠੀਕ ਅਸਲ ਜਦ ਹਮ ਦਰਸ਼ਨੇ ਦਿਖਾਇਆ ਉਹਨਾਂ ਨੂੰ ਹੋਰ ਕੀ ਦੱਸ ਹੈ ਹੋਰ ਕਿਸੇ ਇਹ ਜਿਹੜੀ ਕਥਾ ਨਾ ਗੁਰਬਾਣੀ ਦੀ ਸਭ ਦੀ ਕਥਾ ਹੈ ਆਈ ਤਾਂ ਕਿ ਅਜਾਮ ਅਜਾਮਲ ਪਾਪੀ ਜਗ ਚਾਣੇ ਜਦ ਕਦੇ ਜਣੇ ਸਰੇ ਅੰਦਰ ਅਜਾਮਲ ਪਾਪੀ ਬੈਠੇ ਅਜੈ ਨਹੀਂ ਅਜੈ ਜਿਹਦੇ ਪਾਪੀ ਹੈ ਵਿਰੋਧ ਕਰਦਾ ਹੁਕਮ ਦਾ ਜਗ ਚਾਣੇ ਸਾਰਾ ਸੰਸਾਰ ਜਾਣਦਾ ਰਹੇ ਅੰਦਰ ਵੇਖਾ ਕੁਰਬਾਨੀ ਦੀ ਕਥਾ ਸਬਦੀ ਕਥਾ ਠੀਕ ਹੈ ਜੀ ਰਮਾਇਣ ਦੀ ਕਥਾ ਸਬਦੀ ਕਥਾ ਨਹੀਂ ਹੈ ਮਹਾਭਾਰਤ ਦੀ ਕਥਾ ਸਬਦੀ ਕਥਾ ਨਹੀਂ ਹੈ ਕੁਰਾਨ ਦੀ ਕਥਾ ਸਬਦੀ ਕਥਾ ਨਹੀਂ ਹੈ ਸਭ ਕਰ ਦੀ ਕਥਾ ਹੈ ਤਾਂ ਸਬਦੀ ਕਥਾ ਹੈ ਦੀ ਕਥਾ ਹੈ ਕਥਾ ਹੈ ਹਾਂਜੀ ਤਿੱਥੈ ਸੋਗ ਵਿਜੋਗ ਨ ਵਿਆਪਈ ਅਸਥਿਰ ਜਗਤੀਆ ਤੇ ਤੇ ਸੋਗ ਵਿਯੋਗ ਨਾਲ ਜਾਬੀ ਉੱਤੇ ਸੋਗ ਰਾਂ ਹੈ ਨਾ ਵਿਯੋਗ ਆ ਫੇਰ ਲਬਾ ਜਾ ਰਿਹਾ ਤੇ ਜਿਆਦਾ ਉਜਾੜੀ ਛੱਡ ਦੂ ਆਸਰ ਜੰਗ ਤੀਆ ਸਾਰਾ ਅਸਰ ਹੋ ਗਿਆ ਸੰਸਾਰ ਆਪ ਅਡੋਲ ਹੈ ਡੋਲ ਸੰਸਾਰ ਵਿੱਚ ਅਡੋਲ ਹੈ ਚਲਦੇ ਗੱਡੀ ਵਿੱਚ ਆਪ ਟਿਕਿਆ ਬੈਠਾ ਚਲਦੇ ਹਵਾਈ ਜਹਾਜ਼ ਪੱਥਰ ਦੇ ਮੂਰਤੀ ਬੈਠੀ ਹੈ ਆਪ ਅਡੋਲ ਹੈ ਸ ਕਿ ਆਜ ਡੋਲਦਾ ਠੀਕ ਹੈ ਜੀ ਇਸ ਵਿਦਵਾਨਾਂ ਦੀ ਖੋਪੜੀ ਤੇ ਪਾ ਦਿਓ ਤੁਸੀਂ ਆਪਣੇ ਤਰੀਕੇ ਨਾਲ ਉਹ ਐ ਕਹਿੰਦੇ ਆ ਗੁਰਮੁਖ ਜਗਤ ਵਿੱਚ ਮਾਇਆ ਦੇ ਮੋਹ ਵੱਲੋਂ ਅਡੋਲ ਰਹਿੰਦਾ ਮਾਇਆ ਕੀ ਕਰਦੀ ਆ ਫਿਰ ਉਹ ਵੱਲੋਂ ਨਹੀਂ ਅਡੋਲ ਰਹਿੰਦਾ ਮਾਇਆ ਤੋਂ ਡੋਲਦਾ ਕੋਈ ਆ ਡੋਲਣੀ ਡੋਲਣੀ ਮਾਇਆ ਵਿੱਚ ਆ ਬੜੋਲ ਕੱਲੇ ਠੀਕ ਹੈ ਜੀ ਇਹ ਕਹਿੰਦੇ ਹੋ ਕਿ ਡੋਲਣੇ ਵਾਲਾ ਵਿੱਚ ਆਪ ਅਡੋਲ ਹੈ ਤਾਂ ਉਹਨਾਂ ਨੂੰ 100% ਨੰਬਰ ਮਿਲ ਜਾਂਦੇ ਉਹ ਤਾਂ 33% ਨੰਬਰਾਂ ਨੇ ਕਾਬਲ ਨਹੀਂ ਅਰ ਤੋਰਾਂ ਦੇ ਕਲੀਅਰ ਨਹੀਂ ਉਹਨਾਂ ਨੂੰ ਗੱਲ ਗੱਲ ਕੀ ਹੈ 33% ਨੰਬਰਾਂ ਨੇ ਕਾਬਲ ਨਹੀਂ ਉਹਨਾਂ ਦੇ ਆਪ ਠੀਕ ਹੈ ਜੀ